ਸਰਬ ਬੈਕੁੰਠ ਮੁਖ ਮੋਖ ਪਾਏ ਏਕ ਨਿਮਖ ਹਰ ਕੇ ਗੁਣ ਗਾਏ ਸਰਬ ਬੈਕੁੰਠ ਮੁਖ ਮੁਖਤ ਪਾਏ ਸਰਬ ਬੈਕੁੰਠ ਜਿੰਨੀਆਂ ਬੈਕੁੰਠ ਹੈ ਹੋਈਆਂ ਨੇ ਨਾ ਸਾਰੀਆਂ ਇਕੱਠੀਆਂ ਪਾ ਲਈਓ ਠੀਕ ਹੈ ਜੀ ਸਾਰੀਆਂ ਮੁਕਤੀਆਂ ਸਾਰੇ ਬੈਕੁੰਠ ਸਾਰੇ ਮੁਕਤੀਆਂ ਦੇ ਮੋਖ ਪਾ ਲਏ ਜੀ ਸਾਰੀਆਂ ਮੁਕਤੀਆਂ ਦੇ ਮੋਖਾਂ ਦੇ ਬੱਚੇ ਆ ਗਏ ਸਭ ਕੁਝ ਪਾ ਲਿਆ ਉਹਨਾਂ ਨੇ ਬਹੁਤ ਕੁਝ ਲਿਖਿਆ ਹੋਇਆ ठीक है एक एक नेम करके गुण, गुण गाए बस जी ने हर जगह गुण गाए ठीक है जी ओ, होगा और सारी ने सब कुछ गुरु मिल गया कुछ बचया ही ठीक है जी मत्ति देवी देवर श्रेष्ठ हो गई है जी हां हां सगल परिवार में श्रेष्ठ हां सारे परिवार जो श्रेष्ठ हो गया ठीक है जी ਪਤੀ ਦੇਵੀ ਦੇਵਾਰ ਜੇ ਸੁਟ ਜੇ ਪੂਰਾ ਸਾਰਾ ਸਭ ਤੋਂ ਵੱਡਾ ਬਰ ਮਿਲ ਰਾਜ ਭੋਗ ਬੜਾਈ ਹਰ ਕੇ ਨਾਮ ਕੀ ਕਥਾ ਮਨ ਭਾਈ ਅਨੇਕ ਰਾਜ ਅਨੇਕ ਪ੍ਰਕਾਰ ਦਾ ਮਿਲ ਗਿਆ ਇੱਕ ਪ੍ਰਕਾਰ ਦਾ ਰਾਜ ਜਿਵੇਂ ਲਿਆ ਦੇ ਪ੍ਰਕਾਰ ਦਾ ਮਿਲ ਗਿਆ ਰਾਜ ਆਦਾ ਇੱਕ ਪ੍ਰਕਾਰ ਦਾ ਰਾਜ ਮਿਲੜੀ ਇਹਦਾ ਅਮਰ ਨੇ ਅਨੇਕ ਰਾਜ ਬਹੁਤ ਪ੍ਰਕਾਰ ਦਾ ਸਾਰੇ ਪ੍ਰਕਾਰ ਦਾ ਰਾਜ ਲਾਣ ਦੀ ਗੱਲ ਗੁਰੂ ਕਰਦਾ ਤੁਸੀਂ ਬਹਿ ਗਏ ਕੋਣ ਉਹ ਬਹੁਤਾ ਸਿਆਣਾ ਕੋਣ ਜਿੱਤ ਕੀਤੇ ਬਹਿ ਗਏ ਜਾਂ ਰਾਜ ਆ ਜੇ ਦਾ ਉਹ ਬੋਗ ਬੜੀ ਬਹੁਤ ਬੜਾਈ ਹਾਂਜੀ ਇਹ ਚੱਟਾ ਇਹ ਚੱਟਾ ਬੋਦੇ ਅਗਲਾ ਲੈ ਲੈ ਸਰਦਾਰ ਪੰਡਤ ਦੀ ਗੱਲ 'ਚ ਉਦੇ ਮਗਰ ਲੱਗ ਲੇ। ਇਹ ਕਹੇ ਜੀ ਹਰ ਕੇ ਨਾਮ ਸਫਾ ਮੰਨ ਭਾਈ। ਹਰ ਕੇ ਨਾਮ ਕੀ ਜੇ ਇਹ ਕਥਾ ਹੈ ਗੁਰਬੰਦੀ ਹੈ ਜੀ ਤੇ ਮਨ ਦਾ ਬਹੁਤ ਬਰਕਤ ਤੇ ਰਾਜ ਬਣ ਗਏ, ਜੋਗ ਬਣ ਗਿਆ, ਵੜਿਆਈ ਬਣ ਗਈ। ਠੀਕ ਹੈ ਜੀ। ਹਾਂ ਜੀ ਬਹੁਤ ਭੋਜਨ, ਕਾਪਰ, ਸੰਗੀਤ, ਰਸਨਾ, ਜਪਤੀ, ਹਰ ਹਰ ਨੀਤ। ਔਰ ਭੋਜਨ ਭੋਜਨਾ ਨਾ ਅਨੰਤ ਪ੍ਰਕਾਰ ਦੇ ਕੱਪੜੇ ਅਨੰਤ ਪ੍ਰਕਾਰ ਦੇ ਸੰਗੀਤ ਅਨੰਤ ਪ੍ਰਕਾਰ ਦਾ ਦੇਖੋ ਵਰਮਨ ਜੀ ਕਿੰਨਾ ਸੰਗੀਤ ਹੈ ਕਿੱਥੋਂ ਮਲੇ ਨੇ ਅੱਜ ਖਾਣਾ ਸੱਜ ਪਹਿਣਾ ਠੀਕ ਹੈ ਜੀ ਭੋਜਨ ਕੀ ਹੈ ਕੱਟ ਪਹਿਣਾ ਤਾਂ ਵਧੀਆ ਕੱਪੜਾ ਕੀ ਹੈ ਠੀਕ ਹੈ ਜੀ ਹਾਂ ਸਾਰਾ ਮੀਤ ਜਿਹੜੀ ਰਸਨਾ ਹਰ ਹਾਲ ਵਿੱਚ ਜਪਦੀ ਹੈ ਗੁਰਬਾਣੀ ਨੂੰ ਉਹ ਤਾਂ ਹੋਰੇ ਤਰ੍ਹਾਂ ਦਾ ਉਹਨੂੰ ਇਹਨਾਂ ਕੱਪੜਿਆਂ ਦੀ ਵਾਰਾਂ ਦੀ ਲੋੜ ਸੀ ਹੂੰ ਕੱਪੜਿਆਂ ਦੀ ਲੋੜ ਹੈ ਲਾਸ਼ ਰੂਹ ਬਾਹਰ ਲੈ ਠੀਕ ਹੈ ਆਧਵਾ ਨੂੰ ਵੀ ਲੋੜਾ ਕੱਪੜੇ ਦੀ ਬਾਹਰ ਦੀ ਭਲੀ ਸ਼ੁਕਰਣੀ ਸੋਭਾ ਤਨਵੰਤ ਹਿਰਦੇ ਬਸੇ ਪੂਰਨ ਗੁਰਮੰਤ ਅਲਿਸੋ ਕਾਰਵੀ ਸੋਭਾ ਧੰਵੰਤ ਉਹਦੀ ਕਰ ਸੋਹ ਭਲੀ है। ਤੋ ਕੰਨ ਪਲਾ ਕਰਨ ਵਾਲੀ ਹੈ ਆਪਣਾ ਵੀ ਪਲਾ ਕਰਨ ਵਾਲੀ ਹੈ ਹੂੰ ਹੂੰ ਓਬਾ ਧੰਵੰਤ ਅਨੁਗੁਣ ਕਰਕੇ ਦੀ ਸੋਭਾ ਵੀ ਹੈ है। ਗੁਰ ਕਰਕੇ ਸੋਭਾ ਹੈ ਹੂੰ ਅਲਿਸੋ ਇਦੇ ਹਿਰਦੇ 'ਚ ਪੂਰਾ ਵਰਬਾਣੀ ਦਾ ਜਿਹੜਾ ਹੈ ਨਾ ਉਪਦੇਸ਼ ਵਸ ਜਵੇ। ਹੂੰ ਹੂੰ। ਵਰਬਾਣੀ ਦਾ ਉਪਦੇਸ਼ ਜਿਹੜਾ ਹਿਰਦੇ 'ਚ ਵਸ ਆ ਲਵੇ ਉਹਦੀ ਕਾਰਨੀ ਭਲੀ ਹੋ ਜਾਂਦੀ ਹੈ। ਸੁਖ ਹੋ ਜਾਂਦਾ। ਹਾਂਜੀ। ਸਾਧ ਸੰਗੀ ਪ੍ਰਭ ਦੇ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ। ਤਾਂ ਸੰਦੇ ਨਿਵਾਸ ਹੋ ਜਾਂਦਾ। ਪ੍ਰਭ ਦੇ ਨਿਵਾਸ ਠੀਕ ਹੈ ਸਰਬ ਸੂਖ ਨਾਮ ਗੁਣਤਾਸ ਨਾਨਕ ਪ੍ਰਕਾਸ਼ ਸਰਬ ਸੂਖ ਨਾਮ ਪ੍ਰਕਾਸ਼ ਹੂੰ ਸਾਰੇ ਸੁਖ ਮਿਲ ਜਾਂਦੇ ਨੇ ਉਹਦੇ ਅੰਦਰ ਪ੍ਰਕਾਸ਼ ਹੋ ਜਾਂਦਾ ਜਾਂ ਤਾਂ ਪ੍ਰਕਾਸ਼ ਹੁੰਦਾ ਸਾਰੇ ਸੁਖ ਉਹਦੇ ਨੇ ਪ੍ਰਕਾਸ਼ ਚ ਸਾਰੇ ਸੁਖ ਨੇ ਐਸਾ ਚਾਨਣ ਹੁੰਦਾ ਅੰਦਰ ਪਰਮ ਰਹਿੰਦਾ ਹੀ ਨਹੀਂ ਤਾਂ ਕੋਈ ਰਹਿ ਨਹੀਂ ਉਹਦੀ ਸਾਰੇ ਸੁੱਖੇ ਨੇ ਹਾਂਜੀ ਸਾਧ ਦੇ ਨਿਵਾਸ ਤੋਂ ਕੀ ਕੇ ਸੰਗ ਜੁੜ ਗਈ ਇਹ ਇਹ ਆਪਣੇ ਅੰਦਰ ਜੁੜਿਆ ਰਹਿੰਦਾ ਹਾਂ ਹਾਂ ਆਪਣੇ ਸੂਲ ਨਾਲ ਜੁੜਿਆ ਰਹਿੰਦਾ ਜਦ ਹਾਂ ਹਾਂ ਇਹਦੇ ਬਾਰੇ ਦੱਸੋ ਥੋੜਾ ਹਿਰਦਾ ਬਸੇ ਬਸੇ ਪੂਰਨ ਗੁਰਮੰਤ ਕਿਉਂਕਿ ਆਪਣੀ ਅਸ਼ਟਪਦੀ ਸਮਾਪਤ ਹੋ ਗਈ ਹੈ 20ਵੀ ਇਹ ਗੁਰਮੰਤ ਦੇ ਨਿਕਰ ਇਹਦੇ ਗੁਰਬਾਣੀ ਗੁਰਮੰਤ ਠੀਕ ਹੈ ਜੀ ਇਹ ਜਿਹੜੀ ਗੁਰਬਾਣੀ ਹੈ ਗੁਰਮੰਤ ਹੈ ਗੁਰਬਾਣੀ ਹੈ ਗੁਰਮੰਤ ਦਾ ਬੁੱਤਰਾ ਹੈ ਹੂੰ ਇਹ ਗੈ ਭਲੇਖਾ ਕੋਲ ਆਲਮ ਆਪ ਨੂੰ ਉਤਾਰ ਦਰਦੀ ਹੈ ਉਹ ਜਿਹੜਾ ਹੁਣ ਆਪਾਂ ਪੜਿਆ ਹੋਇਆ ਹੈ ਨਾ ਭਾਈ ਗੁਰਦਾਸ ਦੀਆਂ 12 ਚ ਇੱਕ ਪੰਕਤੀ ਆਉਂਦੀ ਹੈ ਨਾ ਵਾਹਿਗੁਰੂ ਗੁਰਮੰਤਰ ਹੈ ਬਹੁਤ ਪੈਨ ਲੋਕਾਂ ਨੂੰ ਚਲੋ ਪੜ ਦਿਆਂ ਲਿਖਿਆ ਹੋਇਆ ਲਿਖਿਆ ਹੋਈ ਹੈ ਉਹਦਾ ਨਾਮ ਹੋਇਆ ਅੱਛਾ ਜੀ ਭਾਈ ਗੁਰਦਾਸ ਨੇ ਕੋਈ ਬਾਤ ਨਹੀਂ ਲਿਖੀ ਭਾਈ ਗੁਰਦਾਸ ਹੈ ਜੀ ਕਲਾਸ 12 ਦੀ ਲਿਖ ਸਕਦਾ ਗੁਰਬਾਣੀ ਤੋਂ ਔਲਟਰਨਟ ਸਾਲਾ ਕੁਝ ਉਹਦੇ ਵਿੱਚ ਅੱਛਾ ਜੀ ਉਹ ਤਾਂ ਗੁਰਬਾਨੀ ਦਾ ਵੇਲੇ ਦੀ ਗੱਲ ਨਹੀਂ ਤਾਂ ਮਾਈ ਗੁਰਦਾਸ ਕਵੇਂ ਲੇ ਗਏ ਕਰਾ ਨਾਲ ਉਸ ਵੇਲੇ ਤਾਂ ਬੋਲੀ ਹੋਦੀ ਐ ਅੱਛਾ ਜੀ ਫਿਰ ਆਪੇ ਮਨ ਨੇ ਚਾਰ ਦਾ ਜਾਂ ਖੁੱਲਣ ਲੱਗਦਾ ਜਾਂ ਝੂੜ ਲੱਤ ਆਉਣ ਲੱਗਦਾ ਫਿਰ ਉਹ ਤੇਰੇ ਬਦਲਦੇ ਨੇ ਸੁਪਣੇ ਮੰਦਦੇ ਨੇ ਚਾਲ ਨੇ ਭਾਈ ਗੁਰਦਾਸ ਇੱਕ ਤਾਂ ਬਾਣੀ ਹੈ ਉਹ ਬਾਗ ਬਾਗ ਹੋਵੇ ਤੁਸੀਂ ਆਪੇ ਕੋ ਠੇਲਾ ਉਹ ਨਾਲ ਫਿਰ ਭਾਈ ਗੁਰਦਾਸ ਦਾ ਤਾਂ ਨੋਈ ਨਹੀਂ ਕਿਸੇ ਵਾਰਕਾ ਹੈ ਕਿ ਜਿਹੜੇ ਕਵਿਤਾ ਉਹ ਠੀਕ ਹੈ ਜਿੱਦੀ ਗੁਰਬਾਨੀ ਲਿਖੀ ਗਈ ਹੈ ਨਾ ਉਹ ਤਾਂ ਠੀਕ ਹੀ ਤੇ ਜਿਹੜੇ ਕਵਿਤਾ ਉਹ ਵੀ ਠੀਕ ਮੂਰਤੀਆਂ ਲੈਂਦੀਆਂ ਨੇ ਉਸ ਵੇਲੇ ਨਹੀਂ ਮੂਰਤੀਆਂ ਨੇ 2 ਗਰਿਆਂ ਨੇ 12 ਐ ਕਿਸੇ ਪੱਟ ਤੇ ਅੱਛਾ ਜੀ ਕਿਹੜੀਆਂ ਪਟਦੀਆਂ ਨੇ ਪਾਰਾਂ ਦਖਾਈਆਂ ਲੋਗਰਾਂ ਨੇ ਉਸ ਵੇੜੇ ਲਖਾਈਆਂ ਨੇ ਉਸ ਵੇੜੇ ਟੀਕਾ ਹੋਇਆ ਠੀਕ ਹੈ ਜੀ ਆਹ ਦੰਡੋ ਸੁਬ੍ਹਾ ਉਸ ਟੀਕੇ ਦੇ ਵਿੱਚ ਜਿਹੜਾ ਲਿਖਿਆ ਹੈ ਨਾ ਬਾਓ ਕੋਈ ਕਵਾਉ ਨਾ ਫਿਰ ਇੱਧਰ ਵਰਤਿਆ ਨਾਮ ਦਾ ਕੋਈ ਸ਼ਬਦ ਹੈ ਪਰ ਕਵਾਉ ਨਹੀਂ ਹੈ ਨਾ ਕਵਾਉ ਤਾਂ ਲੱਗਦਾ ਨਹੀਂ ਹੈ ਕੋਈ ਬਾਓ ਹੈ ਇੱਕ ਕਬਾਓ ਹੈ ਕੱਕਾ ਇਧਰ ਤਕਾਉਦਾ ਲਾਟਾ ਤੋੜ ਕੇ ਕੀਤਾ ਪਸਾਓ ਏ ਕੱਕ ਬਾਓ ਕੇਵਲ ਕਹਵਾ ਨਾਲ ਪਸਾਓ ਕੀਤਾ ਇੱਕ ਉਹ ਏਕ ਏਕ ਗਲਪਣਾ ਹੋਇਆ ਅੱਛਾ ਜੀ ਸੰਧੀ ਹੋ ਕੇ ਹੂੰ ਹੂੰ ਪਤਾ ਹੀ ਨਹੀਂ ਹੈ ਵਿਦਵਾਨਾਂ ਨੂੰ ਜਿਆਦਾ ਨੂੰ ਕੀ ਪਤਾ ਹੂੰ ਹੂੰ ਫੜੀ ਜਾਂਦੇ ਨੇ ਨਾ ਇਹਨਾਂ ਨੂੰ ਹਰ ਸਾਲ ਮਤਲਬ ਕੋਈ ਹੱਥ ਬਣਿਆ ਨਾ ਬਣਿਆ ਜੁੜਿਆ ਨਾ ਜੁੜਿਆ ਇਹਨਾਂ ਨੇ ਕੀ ਲੈਣਾ ਜੋੜ ਕੇ ਆਹੋ ਮਚਾਰ ਧਾਰਾ ਦਾ ਖਿਆਲ ਵੀ ਸਾਡੀ ਧਾਰਾ ਵੀ ਠੀਕ ਰਹੇਗੀ ਕਿ ਧਾਰਾ ਕੁਛ ਇਧਰੋਂ ਚੱਲੀ ਗਈ ਕੁਛ ਇਧਰੋਂ ਚੱਲੇ ਗਿਆ। ਪਾਣੀ ਦਾ ਚਾਰੇ ਪਾਸੇ ਪਹਿਲੇ ਆਪੇ ਹੈ ਨਾ ਦਾ। ਅਰਥ ਹਾਂਜੀ। ਠੀਕ ਹੈ ਜੀ ਇੱਥੇ ਸਮਾਪਤੀ ਹੈਗੀ ਜੀ 20ਵੀਂ ਅਸ਼ਟਪਦੀ ਦੀ।